ਪਰਮ ਸਨਮਾਨਯੋਗ ਸਾਧ ਸੰਗਤ ਜੀਓ ਆਪਣੀ ਆਪਣੀ ਰਸਨਾ ਪਵਿੱਤਰ ਕਰਨ ਵਾਸਤੇ ਆਖੋ ਧੰਨ ਸ੍ਰੀ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪ ਜੀ ਨੇ ਹੁਣੇ-ਹੁਣੇ ਕੀਰਤਨ ਸਰਵਣ ਕੀਤਾ ਹੈ ਨਾਮ ਸਿਮਰਨ ਕੀਤਾ ਹੈ ਇਸ ਸਮੇਂ ਨੂੰ ਸਫਲ ਕੀਤਾ ਸੰਸਾਰ ਮੰਡਲ ਦੇ ਵਿੱਚ ਇੱਕ ਐਸੀ ਮਰਜ਼ਾਦਾ ਇੱਕ ਅਟੱਲ ਨਿਜ਼ਮ ਕੰਮ ਕਰ ਰਿਹਾ ਹੈ ਅਕਾਲ ਪੁਰਖ ਨੇ ਸਭ ਕੁਝ ਇੱਕੋ ਜਿਹਾ ਨਹੀਂ ਬਣਾਇਆ ਕੋਈ ਤੇ ਨਿਰਬਲ ਹੈ ਕੋਈ ਬਲਵਾਨ ਹੈ ਕੋਈ ਨਿਰਦਨ ਹੈ ਕੋਈ ਧਨਵਾਨ ਹੈ ਕੋਈ ਔਗਣਾ ਦਾ ਭਰਿਆ ਹੋਇਆ ਹੈ ਕੋਈ ਗੁਣਵਾਨ ਬਣਾ ਦਿੱਤਾ ਤੇ ਕੋਈ ਉੱਚਾ ਹੈ ਕੋਈ ਨੀਵਾ ਹੈ ਕੋਈ ਮਿੱਠਾ ਹੈ ਕੋਈ ਕੌੜਾ ਹੈ ਇੱਕੋ ਜਿਹੀ ਸਮਗਰੀ ਸਾਰੀ ਨਹੀਂ ਬਣਾਈ ਗਈ ਇਹ ਇੱਕ ਮਰਜ਼ਾ ਹੈ ਕਿਸੇ ਕਵੀ ਨੇ ਲਿਖਿਆ ਕਿ ਸਾਰੀ ਦੁਨੀਆ ਜਿੰਨੀ ਵੀ ਅਕਾਲ ਪੁਰਖ ਨੇ ਬਣਾਈ ਹੈ ਰਚਨਾ ਕੀਤੀ ਹੈ ਇਹਦੇ ਵੱਖ-ਵੱਖ ਨਿਜਮ ਨੇ ਤੇ ਕਈ ਰੰਗਾਂ ਵਿੱਚ ਹੈ ਇੱਕ ਰੰਗ ਵਿੱਚ ਸਾਰੇ ਮਨੁੱਖ ਨਹੀਂ ਮਿਲਦੇ ਕਵੀ ਕਹਿੰਦਾ ਏ ਦੁਨੀਆ ਰੰਗ ਬਰੰਗੀ ਏ ਕੋਈ ਕਿਸੇ ਨੂੰ ਖੁਸ਼ ਨਹੀਂ ਕਰ ਸਕਦਾ ਹਰ ਪਾਸੇ ਇਹੋ ਤੰਗੀ ਏ ਇਕਨਾਂ ਦੇ ਮਹਿਲ ਮਕਾਨ ਖੜੇ ਇਕਨਾਂ ਨੂੰ ਕੁੱਲੀ ਨਾ ਜੁੜੇ ਇਕ ਬਦਲ ਨਿੱਤ ਪੁਸ਼ਾਕੇ ਨੂੰ ਇਕ ਤਰਸਨ ਲੀੜੇ ਪਾਟੇ ਨੂੰ ਇਕ ਤੁਰੇ ਤੁਰੰਗ ਨਚਾਉਂਦੇ ਨੇ ਇਕ ਜੁੱਤੀ ਤੱਕ ਨਾ ਪਾਉਂਦੇ ਨੇ ਇੱਕ ਹੱਸਣ ਖੇਡਣ ਡੀਕਣ ਪਏ ਇੱਕ ਵਿੱਚ ਗਰੀਬੀ ਚੀਕਣ ਪਏ ਨਾ ਦੇ ਡੋਲੇ ਆਉਣ ਪਏ ਨਾ ਦੇ ਮਰਦੇ ਨਾਉਣ ਪਏ ਇੱਕ ਖਾਂਦੇ ਪੀਂਦੇ ਹੀ ਮਰਦੇ ਨੇ ਇੱਕ ਭੁੱਖੇ ਹੀ ਮੌਜਾਂ ਕਰਦੇ ਨੇ ਇੱਕਨਾਂ ਦੇ ਸਿਰ ਮਗਰੂਰੀ ਏ ਇੱਕਨਾਂ ਨੂੰ ਭਜਨ ਜ਼ਰੂਰੀ ਏ ਕੋਈ ਪਾਪੀ ਤੇ ਕੋਈ ਸਤ ਸੰਗੀ ਏ ਇਹ ਦੁਨੀਆ ਰੰਗ ਬਰੰਗੀ ਏ ਇੱਕੋ ਜਿਹਾ ਨਹੀਂ ਬਣਾਇਆ ਗਿਆ ਇੱਕ ਕਵੀ ਕਹਿੰਦਾ ਚਮਕਦੇ ਨੇ ਤਾਜ ਹੀਰੇ ਮੋਤੀਆਂ ਜੜਾਉ ਕਿਤੇ ਕਿਤੇ ਪੱਗ ਤੇ ਮੁਸੀਬਤਾਂ ਨੇ ਪਾਰੀਆਂ ਜਰੀ ਪਸ਼ਮੀਨਾ ਕਿਤੇ ਦਿਸਦਾ ਹੰਡਾਵਣੇ ਨੂੰ ਕਿਤੇ ਫਟੀ ਗੁਦੜੀ ਤੇ ਗੁਲਫਾ ਜੁਲਫਾ ਖਿਲਾ ਰੀਆਂ ਇੱਕ ਪੈਸੇ ਤੋਂ ਮਹਤਾਜ ਖੜਾ ਦਿਸੇ ਕੋਈ ਕਿਤੇ ਰਥ ਪਾਲਕੀ ਤੁਰੰਗ ਨੇ ਸਵਾਰੀਆਂ ਕੋਈ ਬੋਝ ਸੀਸ 'ਤੇ ਚੁੱਕ ਕਰੇ ਨਿਤਪੰਦ ਤੇ ਕਿਤੇ ਝੂਲ ਰਹੇ ਹਾਥੀ ਸਿਹਤ ਅਮਾਰੀਆਂ ਕੋਈ ਖੋਲ ਕੋਠੀਆਂ ਤੇ ਕਰੇ ਬਖਸ਼ੀਸ ਧਨ ਕਿਸੇ ਤਾਂ ਹੀ ਲੱਭਣ ਨਾ ਕੌਂਡੀਆਂ ਹੁਧਾਰੀਆਂ ਜਾਮਦੀ ਏ ਜਿੱਥੇ ਨਿਗਾ ਦਿਸਦਾ ਏ ਦਰਾਲਾ ਢੰਗ ਸੱਚੇ ਸਹਬਾ ਨੇ ਕੁਦਰਤਾ ਹੀ ਨਿਆਰੀਆਂ ਕਹਿੰਦੇ ਨੇ ਇੱਕ ਨਾਂ ਦੇ ਘਰ ਸੱਤ-ਸੱਤ ਪੁੱਤ ਖੇਡਦੇ ਨੇ ਇੱਕਨਾਂ ਨੂੰ ਇੱਕ ਬਿਨਾ ਸੁਈਆਂ ਸੰਸਾਰ ਹੈ ਇੱਕ ਜਾ ਮਹਾਤਮਾ ਦੇ ਅੱਗੇ ਹੱਥ ਜੋੜਦੇ ਨੇ ਇੱਕ ਲੁੱਟੇ ਐਸ਼ ਘਰੇ ਲੱਗਾ ਦਰਬਾਰ ਹੈ ਕੋਈ ਇੱਕ ਇੱਕ ਪੈਸੇ ਤੋਂ ਮੁਹਤਾਜ ਖੜਾ ਦਿਸੇ ਕੋਈ ਕੋਈ ਉੱਠੇ ਪਿੱਛੋਂ ਖਾਣਾ ਪਹਿਲੇ ਹੀ ਤਿਆਰ ਹੈ ਕੋਈ ਕੱਟੇ ਫਾਕੇ ਰੋਟੀ ਕਿਤੇ ਨਾ ਨਸੀਬ ਹੁੰਦੀ ਤੇ ਕੋਈ ਉੱਠੇ ਪਿੱਛੋਂ ਖਾਣਾ ਪਹਿਲੇ ਹੀ ਤਿਆਰ ਹੈ ਤੇ ਕਹਿੰਦੇ ਨੇ ਇੱਕ ਸ਼ੀਸ਼ ਮਹਿਲਾ ਵਿੱਚ ਬੈਠੇ ਸੁਖ ਭੋਗਦੇ ਨੇ ਇੱਕ ਨੇ ਝੁੱਗੀਆਂ 'ਚ ਉਮਰਾਂ ਗੁਜ਼ਾਰੀਆਂ ਤੇ ਜਾਮਦੀ ਹੈ ਜਿੱਥੇ ਨਿਗਾਹ ਦਿਸਦਾ ਦਰਾਲਾ ਢੰਗ ਸੱਚੇ ਸਹਿਬਾ ਤੇਰੀਆਂ ਨੇ ਕੁਦਰਤਾ ਹੀ ਨਿਆਰੀਆਂ ਵਾਹ ਵਾਹ ਕੁਦਰਤਾ ਤੇਰੀਆਂ ਨਿਆਰੀਆਂ ਨੇ ਕਿਤੇ ਹੁਸਨ ਤੇ ਕਿਤੇ ਫਤੂਰ ਦਿੱਤਾ ਕਿਤੇ ਟਿੱਬਿਆਂ ਵਿੱਚ ਵਗਾਈ ਗੰਗਾ ਕਿਤੇ ਖੂਹ ਇੱਕੋ ਉਹ ਵੀ ਪੂਰ ਦਿੱਤਾ ਕਿਤੇ ਹੰਸ ਨੇ ਕਾਵਾਂ ਦੀ ਚੋਗ ਚੁਗਦੇ ਕਿਤੇ ਕਾਵਾਂ ਦੀ ਚੁੰਝ ਅੰਗੂਰ ਦਿੱਤਾ ਕਿਤੇ ਦੇਵਤੇ ਮਗਰ ਚੁੜੇ ਲਾਈ ਕਿਤੇ ਹੂਰਾਂ ਨੂੰ ਬਖਸ਼ ਲੰਗੂਰ ਦਿੱਤਾ ਇੱਕੋ ਜੇ ਨਹੀਂ ਬਣਾਈ ਦੁਨੀਆ ਭਾਵ ਇਹ ਹੈ ਗੁਰੂ ਨਾਨਕ ਪਾਤਸ਼ਾਹ ਅੱਜ ਦੀ ਕਥਾ ਵਿੱਚ ਉੱਚੇ ਤੇ ਨੀਵੇਂ ਦੀ ਗੱਲ ਕਰਦੇ ਪਏ ਨੇ ਮਿੱਠੇ ਤੇ ਕੌੜੇ ਦੀ ਕਥਾ ਆਰੰਭ ਕੀਤੀ ਹੈ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਬੈਠੇ ਨੇ ਕਿਸੇ ਜੰਗਲ ਵਿੱਚ ਬਿਰਸ਼ ਦੇ ਥੱਲੇ ਤੇ ਸਾਹਮਣੇ ਇੱਕ ਸਿੰਬਲ ਦਾ ਦਰਖਤ ਹੈ ਸਤਗੁਰਾਂ ਨੇ ਦੇਖਿਆ ਸਿੰਬਲ ਦਾ ਦਰਖਤ ਸੁੰਦਰ ਬੜਾ ਹੁੰਦਾ ਉੱਚਾ ਹੁੰਦਾ ਛਤਰੀਦਾਰ ਹੁੰਦਾ ਇਹਦੀ 4-4 5-5 ਫੁੱਟ ਦੇ ਉੱਤੇ ਛਤਰੀਆਂ ਹੁੰਦੀਆਂ ਨੇ ਬਣੀਆਂ ਹੋਈਆਂ ਸੁੰਦਰਤਾ ਵਿੱਚੋਂ ਸਿੰਮਲ ਦਰਖਤ ਜਿਹੜਾ ਸਭ ਤੋਂ ਸੁੰਦਰ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਦੇਖਿਆ ਚੇਤਰ ਵਿਸਾਖ ਦਾ ਦਿਨ ਸਣ ਫੁੱਲ ਲੱਗੇ ਨੇ ਤੇ ਇਹਨੂੰ ਪੱਤਰਾਂ ਤੋਂ ਪਹਿਲਾਂ ਫੁੱਲ ਲੱਗ ਜਾਂਦੇ ਨੇ ਸਿੰਮਲ ਨੂੰ ਜਦੋਂ ਕਿਤੇ ਫੁੱਲਾਂ ਨਾਲ ਫਲਦਾ ਤੇ ਇਹਦੇ ਉੱਤੇ ਲਾਲ ਸੁਰਖ ਰੰਗ ਦੇ ਫੁੱਲ ਹੀ ਫੁੱਲ ਨਜ਼ਰ ਆਉਂਦੇ ਨੇ ਤੇ ਸੁੰਦਰਤਾ ਇਹਦੀ ਵੱਧ ਜਾਂਦੀ ਹੈ ਵੇਖਿਆ ਕੀ ਹੋਇਆ ਕਿ ਅਸਮਾਨ ਵਿੱਚ ਉੱਡਦੇ ਜਾਂਦੇ ਪੰਛੀਆਂ ਨੇ ਵੇਖਿਆ ਇਹ ਜਿਸ ਬਿਰਸ਼ ਦੇ ਫੁੱਲ ਇੰਨੇ ਸੁੰਦਰ ਨੇ ਪਤਾ ਨਹੀਂ ਫਲ ਕਿੰਨੇ ਕੁ ਵਧੀਆ ਹੋਣਗੇ ਇਹਦੇ ਉੱਤੇ ਬੈਠ ਕੇ ਜਿਸ ਵੇਲੇ ਫਲ ਚੱਕ ਕੇ ਦੇਖੇ ਤੇ ਫੁੱਲ ਫਲ ਫਿੱਕੇ ਅਤੇ ਫੁੱਲ ਬਕਬਕੇ ਸਤਗੁਰਾਂ ਨੇ ਇਥੋਂ ਕਥਾ ਆਰੰਭ ਕੀਤੀ ਹੈ ਕਹਿੰਦੇ ਨੇ ਸਿੰਮਲ ਰੁਖ ਸਰਾਇਰਾ ਸਰਾਇਰਾ ਤੋਂ ਭਾਵ ਹੈ ਸਿੱਧਾ ਤੀਰ ਵਰਗਾ ਸਿੱਧਾ ਸਰਨਾਮ ਤੀਰ ਦਾ ਹੈ ਸਰ ਜੈਸਾ ਸਿੱਧਾ ਤੇ ਸਰਾਇਰਾ ਸਿੱਧਾ ਉੱਚਾ ਬਹੁਤਾ ਤੇ ਮੋਟਾ ਵੀ ਬਹੁਤ ਸੁੰਦਰ ਵੀ ਬਹੁਤ ਆਇ ਕਹਿੰਦੇ ਨੇ ਸਿੰਮਲ ਰੁਖ ਸਰਾਇਰਾ ਅਤ ਦੀਰਘ ਅਤ ਮੁੱਛ ਦੀਰਘ ਤੋਂ ਮੈਨੋਂ ਵੱਡਾ ਮੁੱਛ ਤੋਂ ਬਿਹਾਨੇ ਸੁੰਦਰ ਇਹ ਸੁੰਦਰ ਵੀ ਬਹੁਤ ਹੈ ਤੇ ਓਏ ਜੇ ਆਵੇ ਆਸ ਕਰ ਪੰਛੀ ਆਏ ਆਸ ਕਰਕੇ ਬੈਠੇ ਇਹਦੇ ਉੱਤੇ ਤੇ ਉਹ ਨਿਰਾਸ਼ ਹੋ ਕੇ ਚਲੇ ਗਏ ਜਾਹੇ ਨਿਰਾਸ਼ੇ ਕਿੱਤ ਕਿਉਂ ਚਲੇ ਗਏ ਕਹਿੰਦੇ ਇਸ ਵਾਸਤੇ ਚਲੇ ਗਏ ਕਿ ਫਲ ਫਿੱਕੇ ਫੁੱਲ ਬਕਬਕੇ ਕਮ ਨਾ ਆਵੇ ਪੱਤ ਤੇ ਉਹਨਾਂ ਨੇ ਕੀ ਕੀਤਾ ਜਦਸ ਵੇਖਿਆ ਪਈ ਨਾ ਤੇ ਫਲ ਵਿੱਚ ਸਵਾਦ ਹੈ ਨਾ ਫੁੱਲ ਵਿੱਚ ਰਸ ਹੈ ਤੇ ਨਾ ਇਹਦੇ ਪੱਤਰ ਹੀ ਕਿਸੇ ਕੰਮ ਆਉਂਦੇ ਨੇ ਐਸਾ ਨਕਮਾ ਇਹਨੂੰ ਦੇਖ ਕੇ ਤੇ ਪੰਛੀ ਉੱਡਦਿਆਂ ਨੇ ਵੇਖਿਆ ਨਾਲ ਹੀ ਇੱਕ ਛੋਟਾ ਜਿਹਾ ਬਿਰਸ਼ਾ ਹੈ ਫਲ ਦੇ ਨਾਲ ਝੁਕਿਆ ਹੋਇਆ ਜਮੀਨ ਨੂੰ ਲੱਗਾ ਹੋਇਆ ਇਹ ਹੈ 베ਰੀ ਦਾ ਦਰਖਤ ਪੰਛੀਆਂ ਨੇ ਇਹਦੇ ਉੱਤੇ ਬੈ ਕੇ ਤੇ ਫਲ ਖਾ ਆਪਣੀ ਭੁੱਖ ਦੂਰ ਕੀਤੀ ਤੇ ਜਿਸ ਵੇਲੇ ਰੱਜ ਕੇ ਪੰਛੀ ਅਸੀਸਾਂ ਦਿੰਦੇ ਉੱਠ ਕੇ ਚਲੇ ਗਏ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ 베ਰੀ ਦਾ ਦਰਖਤ ਨੀਵਾ ਹੈ ਤੇ ਇਹਦਾ ਐਸਾ ਸੁਭਾਅ ਐਸਾ ਹੈ ਇਸ ਬ੍ਰਿਸ਼ਣੂ ਜਦੋਂ ਫਲ ਬਹੁਤਾ ਲੱਗਦਾ ਤੇ ਇਹ ਝੁੱਕ ਕੇ ਨੀਵਾ ਹੋ ਜਾਂਦਾ ਮੈਂ ਕਹਿੰਦਾ ਕਿਤੇ ਮਨੁੱਖ ਨੂੰ ਐਸੇ ਕਿਤੇ ਫਲ ਮਿਲ ਜਾਣ ਤੇ ਇਹ ਆਕੜ ਕੇ ਉੱਚਾ ਹੋ ਜਾਂਦਾ ਇਹਦਾ ਸੁਭਾਅ ਉਹਦੇ ਨਾਲ ਨਹੀਂ ਰਲਿਆ ਕਿਉਂਕਿ ਇੱਕੋ ਜਿਹਾ ਬਣਾਇਆ ਨਹੀਂ ਨਾ ਕੋਈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕੀ ਆ ਬਾਤ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ ਪਾਤਸ਼ਾਹ ਕਹਿੰਦੇ ਨੇ ਜਿਹੜੀ ਮਿੱਠਤ ਹੈ ਨਾ ਇਥੋਂ ਹੀ ਇਹਨਾਂ ਦਰਸ਼ਤਾ ਤੋਂ ਐਸੀ ਮਰਜ਼ਾਦਾ ਤੋਂ ਗੁਰਸਿੱਖੀ ਜੀਵਨ ਵਿੱਚ ਮਿੱਠਤਾ ਸੁਗੰਧੀ ਨਿਮਰਤਾ ਇਹਨਾਂ ਬਿਰਸ਼ਾਂ ਤੋਂ ਲਈ ਗਈ ਹੈ ਭਾਵੇਂ ਹੈ ਕਿ ਨਿਮਰਤਾ ਵਾਲਾ ਮਨੁੱਖ ਜਿਹੜਾ ਉਹ ਨੀਵਾ ਹੋਏਗਾ ਹੰਕਾਰੀ ਮਨੁੱਖ ਉੱਚਾ ਹੁੰਦਾ ਇਸ ਵਾਸਤੇ ਨਿਮਰਤਾ ਵਾਲੇ ਨੂੰ ਮੁੱਖ ਰੱਖਿਆ ਇਥੋਂ ਗੁਣ ਲੈ ਗਏ ਨੇ ਹਿੰਦੁਸਤਾਨ ਦਾ ਇੱਕ ਬਹੁਤ ਮਸ਼ਹੂਰ ਕਵੀ ਹੈ ਤੁਲਸੀਦਾਸ ਕਹਿੰਦਾ ਤੁਲਸੀ ਯਾ ਸੰਸਾਰ ਮੇਂ ਪੰਜ ਰਤਰ ਹੈ ਸਾਰ ਮਿੱਠਾ ਬੋਲਣ ਨਿਵ ਚੱਲਣ ਦਇਆ ਦਾਨ ਉਪਕਾਰ ਗੁਸਾਈ ਤੁਲਸੀਕ ਦਾਸ ਕਹਿੰਦੇ ਨੇ ਜਿੰਨਾ ਮਨੁੱਖਾਂ ਵਿੱਚ ਐਸੇ ਗੁਣ ਆ ਜਾਂਦੇ ਨੇ ਮਿੱਠਾ ਬੋਲਣਾ ਅੰਦਰ ਨਿਮਰਤਾ ਹੋਵੇ ਨਿਊ ਕੇ ਚੱਲਣਾ ਤੇ ਜਥਾ ਸ਼ਕਤ ਦਾਨ ਕਰਨਾ ਉਪਕਾਰ ਕਰਨਾ ਇਹ ਜਿਹੜੇ ਪੰਜ ਗੁਣ ਨੇ ਕਿਤੇ ਵਿਰਲਿਆ ਹੀ ਮਨੁੱਖਾਂ ਕੋਲ ਹੁੰਦੇ ਨੇ ਦਇਆ ਦਾਨ ਉਪਕਾਰ ਇੱਕ ਹੋਰ ਕਵੀ ਹੈ ਉਹ ਵੀ ਕਹਿੰਦਾ ਮਿੱਠਾ ਬੋਲਣ ਨਿਭ ਚਲਣ ਹੱਥੋਂ ਵੀ ਕਿਛ ਦੇ ਰੱਬ ਤਿੰਨਾਂ ਦੀ ਬੁੱਕਲੀ ਜੰਗਲ ਕਿਆ ਟੁੰਦੇ ਜਿਹੜੇ ਐਸੀ ਬਿਰਤੀ ਬਣ ਗਈ ਜਿੰਨਾ ਮਲੁਖਾਂ ਦੀ ਸੰਸਾਰ ਵਿੱਚ ਆਣ ਕੇ ਸਤਿਗੁਰੂ ਨੂੰ ਮਿਲੇ ਨੇ ਨਿਤਨੇਮੀ ਏ ਤੇ ਸਤਸੰਗੀ ਜੀਵਨ ਬਣਿਆ ਕਹਿੰਦੇ ਨੇ ਤੇ ਮਿੱਠਾ ਬੋਲਦੇ ਨੇ ਤੇ ਇੱਕ ਦੂਜੇ ਦੇ ਚਰਨੀ ਹੱਥ ਲਾਉਣਾ ਕਿਉਂਕਿ ਸਾਡੇ ਗੁਰੂ ਸਾਹਿਬਾਂ ਨੇ ਇਹ ਮਰਜਾਦਾ ਚਲਾਈ ਸੀ ਨਾ ਕਿ ਰਾਣਾ ਰੰਕ ਬਰਾਬਰੀ ਬੈਰੀ ਪਮਣਾ ਜਗ ਵਰਤਾਇਆ ਇਥੋਂ ਨਿਮਰਤਾ ਅੰਦਰ ਆਉਂਦੀ ਹੈ ਨਿਮਰਤਾ ਵਾਲਾ ਪਾਤਸ਼ਾਹ ਇਹ ਕਵੀ ਕਹਿੰਦਾ ਜਿਹੜਾ ਐਸਾ ਮਨੁੱਖ ਹੈ ਉਹਦੇ ਤੇ ਉਹਨੂੰ ਜੰਗਲ ਵਿੱਚ ਜਾਣ ਦੀ ਕੋਈ ਜ਼ਰੂਰਤ ਨਹੀਂ ਰੱਬ ਉਹਦੇ ਹਰਥਾਂ ਅੰਗ ਸੰਗ ਰਹਿੰਦਾ ਇਹਨੂੰ ਲੱਭਣ ਦੀ ਜ਼ਰੂਰਤ ਨਹੀਂ ਪਵੇਗੀ ਰੱਬ ਤਿੰਨਾ ਦੀ ਭੁੱਖ ਜੰਗਲ ਕਿਹਾ ਟੁੰਡੇ ਕਬੀਰ ਹੁਣ ਸਤਗੁਰੂ ਵਾਲੇ ਸਣ ਜਦੋਂ ਇਨਾਂ ਦਾ ਮਨ ਨਿਰਮਲ ਹੋਇਆ ਤੇ ਇਹਨਾਂ ਨੇ ਆਪਣਾ ਇੱਕ ਨਿਸ਼ਾਨੀ ਦੱਸੀ ਹੈ ਕਹਿੰਦੇ ਨੇ ਕਬੀਰ ਜਿਖ ਤੇ ਕਬੀਰ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਕਹਿੰਦਾ ਜਿਨ੍ਹਾਂ ਦੇ ਅੰਦਰ ਹੰਕਾਰ ਨਿਕਲ ਗਿਆ ਤੇ ਜਿਹੜੇ ਹਉਮੈ ਨੂੰ ਤਜ ਕੇ ਤੇ ਆਪਣਾ ਜੀਵਨ ਬਤੀਤ ਕਰਦੇ ਨੇ ਜਿਨ੍ਹਾਂ ਨੇ ਐਸੀ ਸੂਝ ਬੂਝ ਵਾਲਿਆਂ ਦੇ ਜਿਹੜੇ ਨੇ ਇਹ ਮੇਰੇ ਮਿੱਤਰ ਨੇ ਮੈਂ ਅਰਜ ਕਰ ਰਿਹਾ ਸਾਂ ਕਿ ਗੁਰਬਾਨੀ ਵਿੱਚ ਸਤਗੁਰਾਂ ਨੇ ਨਿਮਰਤਾ ਨੂੰ ਮਹਾਨਤਾ ਦਿੱਤੀ ਹੈ।